ਰਹਿਤ ਅਬਰ ਕੁਛ ਅਬਰ ਕਮਾਵਤ ਰਹਿਤ ਅਬਰ ਕੁਛ ਅਬਰ ਕਮਾਵਤ ਮਨ ਨੇ ਬ੍ਰੇਤ ਮੁੱਖੋ ਗਾੜ ਰਹਿਤ ਅਬਰ ਰਹਿਤ ਹੈ ਉਹ ਬ੍ਰਿਆਦਾ ਦੀ ਗੱਲ ਕੀਤੀ ਉਹ ਰਹਿਤ ਦੀ ਗੱਲ ਕੀਤੀ ਪਹਿਲਾਂ ਬ੍ਰਿਆਦਾ ਦੀ ਗੱਲ ਕੀਤੀ ਉਹ ਜਿਹੜਾ ਕਰਮ ਕਰ ਰਿਹਾ ਮਹਿਆਲਾ ਕਰਮ ਕਰ ਰਿਹਾ ਜੀ ਮਹਿਆਲਾ ਸੋਨੋ ਜੀ ਉਹ ਪਹਿਲਾ ਮਰਜ਼ੀ ਜਿਹੜਾ ਕਰਮ ਹੈ ਉਹ ਰਹਿਦਾ ਹੈ ਇਹ ਰਹਿ ਕੇ ਹਰ ਹਰ ਤੇ ਰਹਦੀ ਹੋਈਆਂ ਮਰਿਆ ਲਾ ਵੀ ਇੱਥੇ ਕੰਮ ਨਹੀਂ ਦੇ ਕੰਮ ਨਹੀਂ ਦੇ ਹੋ ਗਿਆ ਮਰਿਆ ਦੇ ਹਾਂ ਉਹ ਸਭ ਕੰਮ ਨਹੀਂ ਗਿਆ ਉਹ ਰਹਿਦਾ ਚੂਪ ਜਗਾਉਣੀ ਹੈ ਕਰਨਾ ਕੋ ਕਰਨਾ ਜੋ ਵੀ ਕੁਝ ਕਰਦੇ ਦੋ ਤਰ੍ਹਾਂ ਤੋਂ ਹੋਣਾ ਹੈ ਕਰਨਾ ਪਹਿਲਾਂ ਮੁੱਖ ਵੱਖ ਲੈਣਾ ਫਿਰ ਇਹ ਕਰਨਾ ਫਿਰ ਉਹ ਕਰਨਾ ਅਦਾਸ ਕਰਦੀਆਂ ਕਰ ਕਰਦੀਆਂ ਕਿਵੇਂ ਕਰਦੀ ਇਹ ਸਭ ਰਹਿਦਾ ਰਹਿਤਾ ਵਰ ਅਬਰਕ ਮਾਵਤ ਰਹਿਤਾ ਬਿਹੋਰ ਸੀ ਕੱਪ ਨਾਲਾ ਕੱਪ ਤੇ ਕੋਈ ਸ਼ੋਰ ਸੀ ਰਹਿ ਤੋ ਇਹਦਾ ਕੰਮ ਕਰਨਾ ਰਹਿ ਤੋ ਰਹਿ ਤੋ ਰਹਿ ਜਾਣੇ ਬੁਕਾਰੋ ਸਿਕੋ ਕਰਤੀ ਸਾਰੀ ਕਰ ਜੇ ਰਹਿ ਤੈ ਉੱਤ ਰਹਿ ਜੋ ਕੋ ਦੇ ਤੋ ਰਹਿ ਰਹ ਜਾਂ ਬੁਖਾਰਾ ਬੁਖਾਰ ਅਲੱਗ ਰਹੇ ਜਾਂ ਮੇਰੇ ਤੇ ਬੁਖਾਰ ਲਈ 10 ਸਦੀ ਵਰਦੇ ਉਹ ਕੋ ਤੋਂ ਬੜੇ ਛੜ ਜਾਂਦਾ ਹੈ ਨਾ ਜਦ ਹੁਕਮ ਨੇ ਨਾ ਨਾ ਬੁਖਾਰ ਪਿੱਛੇ ਪੈਰ ਦੱਬਣ ਆ ਜਾਂਦਾ ਹੈ ਨਾ ਇਹ ਫਾੜਨ ਆ ਜਾਂਦਾ ਹੋਏਗਾ ਜਿਹੜੇ ਨਾਮ ਦੇ ਤੇਰੇ ਨਾ ਅਬਰਾਤੀ ਉਹ ਕਹਿੰਦੇ ਮੈਂ ਕੋਈ ਬਹਾਨਾ ਸੌ ਲਾਉਣਗੇ ਫਿਰ ਜਾਣਗੇ ਤਾਂ ਹਾਂ ਕਹਾਂ ਆਪਾਂ ਚੱਲੀਏ ਪਿਛੇ ਚੱਲੀਏ ਜੇ ਨਾ ਬਨੇ ਕਿਸਾਫੇ ਕੋਈ ਜਾਇਆ ਕਹਾ ਫਿਰ ਬਹਿਣੇ ਐਸੇ ਇੱਧਰ ਹੋ ਜਾਇਆ ਜੀ ਜੀ ਸਾਰ ਦੇ ਸਾਰ ਦੇ ਪ੍ਰੋਫਟ ਫੜਦੇ ਆਵੇ ਜਾ ਵੀਡੀਓ ਤੇ ਬੋਲ ਜਾਂਦੇ ਉਸੇ रहता रहत रहत विचले रहने पुकार अप्पे दूर चले गए सहजान पुकार रहत अवर और कुछ जी रह कुछ अवर रह ना कुछ और थी अवर, कुछ अवर तुम आवो कमा को बोलिया कर को दूर माननी प्रीत मुखो कांड लावत बाह विच प्रीत है नहीं मुखो बड़ी प्रीत बुद्धा ਗੁਰੂ ਗ੍ਰੰਥ ਸਾਹਿਬ ਨੂੰ ਬੜਾ ਬਲ ਰਿਹਾ ਆ ਸੇ ਕੋਲ ਉਹ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ ਕੀ ਬਲ ਦੇਣ ਤੁਸੀਂ ਕਿਹਦਾ ਦੱਸੋ ਕੀ ਮੰਗਦਾ ਹੋ ਚੋਰੀ ਕਰਦੇ ਮਗਰੋਂ ਮੋੜਦੇ ਨਹੀਂ ਤਾਂ ਕੀ ਮੰਗਦਾ ਹੋ ਜਿਹ ਹੈਗਾ ਕੀ ਮੰਗਦਾ ਹੋ ਹੈਗਾ ਤਾਂ ਸਭ ਜੀ ਲੈ ਆਏਗਾ ਬਾਣੀ ਲਿਖਿਆ ਕਿਹਦੀ ਕਿਹਦੀ ਬਾਣੀ ਹੈ ਕਿ ਚਲ ਪਤਾ ਜੋ ਕਹਿੰਦਾ ਜੋ ਲਿਖਿਆ ਆਇਆ ਚ ਇਹਨੂੰ ਨਹੀਂ ਮੰਨਦੇ ਤੇ ਫਿਰ ਇਹ ਨੂੰ ਕੀ ਬੁਣਨ ਹੋਇ ਤੁਸੀਂ ਆਮਦਾ ਉਲਟ ਸਾਰ ਜੇ ਉਹ ਇਹ ਕਹਿੰਦਾ ਫਿਰ ਇਹਨੂੰ ਮੰਨ ਹੋ ਤੁਸੀਂ ਇਹਨੂੰ ਬੰਧਣ ਦੀ ਲੋੜ ਨਹੀਂ ਐਡੀ ਬੁੱਧੋ ਐਡੀ ਗੱਲ ਬੋਤਾ ਇਹਨੂੰ ਉਹਨੂੰ ਇਹ ਤੇ ਸ਼ੈਤਾਨ ਹੈ ਗੁਰੂ ਦੀ ਗੱਲ ਗੁਰੂ ਨੂੰ ਬੰਦ ਕਰ ਗੁਰੂ ਹੈਗਾ ਗੁਰੂ ਆ ਰਹੇ ਗੁਰੂ ਤਾਂ ਹੈਗਾ ਤੁਸੀਂ ਗੱਲ ਗੱਡੀ ਮੰਨੀਓ ਦੱਸੋ ਇਹਦੀ ਬੰਦੜੀ ਸੀ ਇਹਨੂੰ ਨਹੀਂ ਸੀ ਬੁਲੜੋ ਇਹਦੀ ਗੱਲ ਮੰਨਣੀ ਹੈ ਗੁਰੂ ਨੂੰ ਨਾਲ ਸੀ ਇਹਦੀ ਗੱਲ ਬੰਦਣੀ ਇਹਨੂੰ ਬੁਲੜ ਜੇ ਬਾਪ ਨੂੰ ਬਾਪ ਬਣ ਜੇ ਤਾਂ ਬਾਪ ਦਾ ਕੰਡ ਬਦੂ ਜੇ ਬਾਪ ਦਾ ਕਾਇ ਨਹੀਂ ਮੰਨਦਾ ਉਹ ਬਾਪ ਦਾ ਰਹਿ ਗਿਆ ਫਿਰ ਬਾਪ ਆਹ ਕੋਣ ਹਾਂ ਦਾ ਕਹਿਣੇ ਆ ਬਸ ਕਰ ਨਾ ਮੁੰਡੇ ਦਾ ਤੋਂ ਹੋਇਆ ਅੱਜ ਬੰਦੇ ਦਾ ਕੰਨੀ ਟੁੱਟ ਗਈ ਲੋਕ ਕਹਿੰਦੇ ਔਲਾਦੋਂ ਦੀ ਬੜੀ ਲਾਇਕ ਹੈ ਉਹ ਤਾਂ ਲਾਇਕ ਹੈ ਐਡਾ بڑا ਸ਼ਾਮਾਨਾ ਦਾ ਪੋੜ ਵਾਰੇ ਜਿਆਦਾ ਦਵਾਈਆਂ ਕੋਲ ਸੀ ਤਾਂ ਉਹ ਮੁੰਡੇ ਨਾ ਲਾਇਕ ਨਹੀਂ ਲੋਕਾਂ ਹੀ ਕਹਿੰਦੇ ਸਿੱਖਾਂ ਨੂੰ ਲੋਕਾਂ ਨੇ ਸਿਖਲੀ ਰੱਖੇ ਜਾਨ ਤੁਸੀਂ ਦੇਖੋ ਲੜੀ ਜਾਓ ਕੋਲੋਂ ਰਹਿ ਜੀਓ ਕਿਹਨਾਂ ਉਹ ਨਿਮਨਤਾ ਦੀ ਸਖੋਂ ਗੁਰੂ ਨਿਮਨਤਾ ਦੀ ਸਖੋਂ ਗੁਰੂ ਦਾ ਬਰੇ ਕਾਰਜ ਰਹਤਾ ਅਵਰ ਉਸ ਉਪਰ ਗੁਰੂ ਦਾ ਬਰੇ ਗੁਰੂ ਦਾ ਬਰੇ ਤੂੰ ਹੋਰੇ ਕੁਝ ਕਰ ਰਹੇ ਹੋ ਬਾਤ ਨਹੀਂ ਪ੍ਰੀਤ ਉਹ ਬਖੋਂ ਕੱਲ ਲਾਉਣੇ ਇਹਨੂੰ ਮਾ ਸਾਡਾ ਗੁਰੂ ਹੈ ਗੁਰੂ ਹੁੰਦਾ ਕੋਈ ਗੱਲ ਨਾ ਮੰਨਦਾ ਭੁਖਾ ਕਾਰਨ ਲਾਉਣਾ ਵੀ ਗੁਰੂ ਬੰਦੇ ਆ ਸੀ ਜੇ ਗੁਰੂ ਮੰਨਦੇ ਤਾਂ ਸਭ ਕੁਛ 20 ਤੇ 10 ਪਾਸ਼ਾ ਨਾਲ ਆ ਪਹਿਲਾਂ ਹੀ ਹੈ ਛੇਵੇਂ ਪਾਸ਼ਾ ਨੇ ਕੀ ਰਹਤ ਬੜੀ ਛੇਵੇਂ ਪਾਸ਼ਾ ਬੜੀ ਕੀ ਹੈ जानन हार प्रभु परवीन बाहर देखना काहू नहीं उधर प्रभु परवीन है अंदर बैठा है वो जानदा ही है ओके नहीं जानदा वो रहा हम के पैदा उधर बैठा प्रभु परवीन ਜਾਣਨ ਹਾਰ ਪ੍ਰਭੂ ਪਰਵੀਰ ਪ੍ਰਭੂ ਤਾਂ ਪਰਵੀਰ ਪਹਿਲੇ ਜਾਣਦਾ ਜਾਣਨ ਹਾਰ ਇੱਕ ਤਾਂ ਜਾਣਨ ਹਾਰ ਹੁੰਦਾ ਵੀ ਜਾਣਨ ਹਾਰ ਪੂਰਾ ਪੂਰਾ ਨਹੀਂ ਦੇਖਦਾ ਐਕਸਰੇ ਅੰਦਰੋਂ ਵੀ ਦੇਖ ਲੈਂਦਾ ਆਓ ਉਹਦੀ ਬੁੱਧੀ ਅchre ਵਾਲੀ ਆ ਲਾਈਟ ਬੰਦੀ ਬਬੇ ਬੁੱਧੀ ਦੀ ਐਨੀ ਧੂਈ ਵਾਰ ਵਾਰ ਬੰਦੀ ਸੜਾ ਪ੍ਰਵੀਨ ਉਹਦੀ ਅchre ਵਾਲੀ ਲਾਈਟ ਅੰਦਰ ਤੱਕ ਦੇਖ ਲੈਂਦਾ ਸਿਕੰਦਰਾ ਸਿਕੰਦਰਾ ਜਾਨੂ ਪ੍ਰਭੂ ਬਾਹਰ ਦੇਖਣਾ ਬਾਹਰ ਨਾ ਤਾਂ ਉਹ ਕੋਈ ਬਾਹਰ ਤੋਂ ਐਸਾ ਨਾ ਦੇਖੇ ਜੰਮੇ ਸਰੀਰ ਦਾ ਅੰਦਰ ਨਾ ਤਾਂ ਕਦੇ ਐਸਾ ਜਿੰਮਨ ਬਾਹਰ ਦੇਖਦਾ ਅੰਦਰ ਕੀਤਾ ਸਬੂਰ ਤੇ ਉਹਦੇ ਕਿਵੇਂ ਬਣ ਗਏ ਦੂਰ ਤੇ ਕਿਵੇਂ ਆ ਗਿਆ ਕੋਈ ਗੁਰੂ ਆਦਮੀ ਪੇਰ बन ਸੇਵੇਂ ਬਣ ਗਿਆ ਇਹ ਪਗੰਬਰ ਵਰ ਦੂਰ ਜੇ ਕਹਾਂ ਬੁੱਧੀ ਵਰਜੂ ਪਾਰ ਵੇਖ ਨਹੀਂ ਹੁੰਦਾ ਤਾਂ ਕਾਹੂ ਪੇਰ ਨਾ ਕਿਥੇ ਚੀਰੋਂ ਪਿੱਛੇ ਰਹਿ ਗਿਆ ਕਿਥੇ ਚੀਦਾ ਤੁਸੀਂ ਉਹਨੂੰ ਪਤਾਸੇ ਚ ਲਾ ਕਿਦੇ ਜੀ ਜਰਾ ਨਹੀਂ ਪੁੱਛਦਾ ਕੋਈ ਸਾਧਨ ਉਹਦਾ ਰਿਕਟੇ ਦੋ ਅਸਰ ਕੀ ਹੁੰਦਾ ਪ੍ਰਭੂ ਦੇ ਜਿਹਨੂੰ ਪ੍ਰੇਮ ਕੀਓ ਜਿਹਦੀ ਬਰਪਾ ਆਸਰ ਹੁੰਦਾ ਇਹ ਦੇਣਾ ਭੇਜਦਾ ਉਹ ਬਾਕੀ ਕਿਸੇ ਦਾ ਨਾ ਭੇਜਦਾ ਪ੍ਰੇਮ ਨੂੰ ਛੱਡ ਕੇ ਜੇ ਕੋਈ ਕਿਸੇ ਨਾਲ ਪ੍ਰੇਮ ਕਰਦਾ ਕਿਸੇ ਨਾਲ ਨਫ਼ਰਤ ਕਰਦਾ ਨਾ ਕਿਸੇ ਚੀਜ਼ ਦੀ ਜਦੋਂ ਵੀ ਨਫਰਤ ਆਉਂਦਾ ਉਦੋਂ ਅਲੋਡੇ ਦੀ ਹ ਸਾਰੀ ਇਲਾਜ ਹੋਦੀ ਹੈ ਰਬੂ ਦੀ ਉਹਦੇ ਇਲਾਜਾਂ ਨਾਲ ਨਫਰਤ ਕਰੋ ਕਿਉਂ ਨੂ ਪ੍ਰੇਮ ਕੇ ਸਜਾ ਕੇ ਹਾਂਜੀ ਬਾਹਰ ਭੇਜਣਾ ਬਾਹਰ ਭੇਜਣਾ ਕੰਮ ਨਹੀਂ ਤੇ ਸੌਖੀ ਨਹੀਂ ਨਾਲੇ ਬਾਹਰ ਕੋਈ ਭੇਜਾ ਬਾਹਰ ਭੇਜ ਵਾਲੇ ਆਦਮੀ ਤਾਂ ਕਿਸੇ ਚੀਜ਼ ਨਾਲ ਤੇ ਜੱਜਿੰਦੇ ਰਹੇ ਉਹ ਲੱਗਣੇ ਕੋਲ ਸਤੰਤ ਪਹਿਲਾਂ ਗੱਲਾਂ ਨਾਲ ਨਹੀਂ ਪੇਸ਼ ਆ ਜੀ ਮੈਂ ਤਾਂ ਆਣੀ ਬਣੀ ਹੋਈ ਹਾਂ ਜੀ ਜੀ ਪ੍ਰਸਾਦ ਕਰ ਲਿਆ ਜੀ ਉਹ ਪ੍ਰਸਾਦ ਕਰ ਲਿਆ ਉਹ ਕਿਹੜਾ ਕਹਾਣੀ ਹੈ ਮੈਂ ਉਹ ਉਹ ਜਦ ਮੈਂ ਕਹਿੰਦਾ ਜੀ ਜੀ ਵੱਟ ਕੇ ਦੇਸਤੀ ਜੀ ਜੀ ਦੇ ਸਰ ਦਾ ਹੋਰ ਕਰਤਾ ਹੈ ਕਰ ਤੋਂ ਕਹਾਂ ਉਹ ਇਧਰ ਰੱਖ ਲੈ ਫੇ ਇਧਰ ਹੀ ਹੋ ਕੇ ਸਿੱਧੀ ਸਾਚੀ ਗੱਲ ਹੈ ਪਾਣੀ ਤੇ ਦੌੜਦਾ ਕਿਤੇ ਪਾਣੀ ਦਾ ਆਪੇ ਜੱਲਾ ਕਰਦਾ ਲੋਕਾ ਪਾਣੀ ਤੋਂ ਕੌਣ ਦੂਰ ਉਹਦੇ ਦੇ ਕਿਸੇ ਅਸਲ ਦੀ ਪੈਦਾ ਉਹਦਾ ਅਸਲ ਲੋਕਾ ਦਾ ਨਹੀਂ ਬਾਦਨੇ ਤੇ ਜਣਾ ਚਿੱਤ ਕੀਣਾ ਚਿੱਤਰੂ ਕਿ ਹੂੰ ਕੌਣ ਪ੍ਰਗੂਰ ਕੌਣ ਤੇ ਹੂੰ ਹਾਂ ਪਰ ਮੂਰਤ ਦਾ ਬੇਦਕਾ ਤੇ ਹੂੰ ਓਹਰ ਪਰਮੈਸ਼ਰ ਦੀ ਗੱਲ ਹੈ ਤੇ ਤੁਹਾਨੂੰ ਫਰਮਾਨ ਹੋ ਸਰਸਤ ਪਤਾ ਉਹ ਤਾਂ ਉਹਦੇ ਨਾਲ ਜੁੜਾ ਅਸੀਂ ਨਹੀਂ ਉਹ ਨੂੰ ਸਕਦੇ ਸੱਚਾ ਸਭ ਲੋਕ ਇਹ ਦਾਲ ਸੰਸਾਰ ਦੇ ਲੋਕਾਂ ਦਾ ਬਾਹਰ ਪੇਖ ਹੈ ਜੀ ਉਹਦਾ ਸਾਡੇ ਕਿਸੇ ਛੀਂਹਾਂ ਪੇਜ ਸਕਦਾ ਇਹ ਜਾਂ ਚਾਨਦ ਕਰਤਾ ਸੋਨਾ ਚੜਤਾ ਅਰ ਜੀ ਸਭੇ ਉਹ ਕਰਤਾ ਕੋਈ ਛੀਂਹ ਨਹੀਂ ਉਹ ਨੂੰ ਕੋਈ ਸੱਜਦਾ ਕਰਦਾ ਕੋਈ ਕੋਹ ਨੂੰ ਜੀਰਾ ਦੇਤਾ ਉਹ ਜੀ ਸੋਨੇ ਦਾ ਬਣਾਤਾ ਐਨੇ ਜੱਗ ਕਰਤੇ ਐਨੇ ਖੰਡ ਬਾੜ ਕਰਤੇ ਨਾ ਗੱਲਾਂ ਕੋਈ ਫਰਕ ਨਹੀਂ ਪੈਂਦਾ ਨਾਲੇ ਆਗਾ ਹੈ ਮਾਇਆ ਅਗਣਾ ਉਹ ਕੋਈ ਦਾੰਦ ਅਸਤਾ ਜਾਲ ਵੀ ਹੁੰਦੀ ਹੈ ਫਤਹ ਅੰਦਰ ਪੰਪੜ ਮਾਜਦੇ ਜੇ ਕੋਈ ਜ਼ਿਆਦਾ ਕੁਝ ਕਰੂਗਾ ਅਕਾਰ ਹੋ ਜੂਰ ਦੇ ਕੋਈ ਜ਼ਿਆਦਾ ਮਾਇਆ ਦਊਗਾ ਅਕਾਰ ਹੋ ਜੂਰ ਅਗਰ ਦੂਆ ਰੂਪ ਹੁਕਮ ਕਰ ਕਾ ਢਟਿਆ ਤਾਂ ਕੋਟੋਲ ਦਾ ਵੀ ਢਟਿਆਗਾ ਚੱਕ ਪਾਏ ਜੀ ਬਾਬਾ ਕੋਲ ਕੋਲ ਤੇ ਫਿਰ ਹੋਦਾ ਰੋਦੇ ਰੂਪ ਪਫੜ ਹੈ ਕੋਟੋਲ ਦਾ ਰੂਪ ਢਟਾ ਰੋਦੇ ਤਾਂ ਇਥੇ ਦੇ اندر ਕੋਰ ਹੁੰਦਾ ਉਹ ਵੀ ਹੁੰਦਾ ਉਹ ਵੀ ਹੁੰਦੀ ਹੈ ਕਰੋ ਜੀ ਕਰੋ ਤੇ ਕਾਬੂ ਪਾਇਆ ਸਰਕਾਰ ਹੁੰਦਾ ਕਰੋ ਉਸ ਤੇ ਕਾਬੂ ਦੱਦਰ ਇਹ ਸਤਾਦੀ ਕਰਦੇ ਪਰ ਜਦੋਂ ਕਰੋ ਆ ਜਵੇ ਉਹਨਾਂ ਦਾ ਸਭਾ ਸਭਾ ਫਟੇ ਉੱਡ ਜਾਂਦਾ ਫਿਰ ਭਾਂਡਾ ਜਾਂਦਿਆਂ ਵੀ ਭਾਫੜਦਾਸ ਹੈ ਤੇ ਸੀਧਾ ਲਾਹ ਨਹੀਂ ਲੈਣਾ ਉਹ ਭਾਫੜਦਾਸ ਕਹਿੰਦਾ ਹੋ ਪਰ ਨਹੀਂ ਤਾਂ ਨਾਲ ਬਣ ਕੇ ਰਾਜੀ ਹੋ ਜਾ। ਜਦ ਗਰੋਧ ਆ ਜਾ। ਜਦ ਗਰੋਧ ਜਿਹੜਾ ਉਹਦਾ ਕੰਟਰੋਲ ਸੀ। ਆਊਟ ਆਫ ਬੁੱਡਲ। ਉਹੋ ਜਿਹੇ ਦਾ ਨੌਂ ਕਰਦਾ ਰਾਜੀ ਹੋ। ਉਹ ਤਾਂ ਜਾਰਾ ਨਹੀਂ ਕਰਦਾ। ਜੇ ਕੋਤ ਤਕੜੀ ਆ। ਉਹਨਾਂ ਜਾੜਾ ਤੋਂ ਸਰਤ ਹੋ ਗਏ। ਜੇ ਕੋਈ ਕਦੇ ਉਹਰਾ ਗੁੱਸਾ ਕਰਦਾ ਹੋਣਾ ਭਵੇ ਇੱਕ ਬੰਦ ਪੂਰਾ ਘੰਟੋਰ ਕਰਕੇ ਕੋ ਸਦੂ ਬੈਠੇ ਬਸਾਉਂ। ਵੀਰ ਰਸਤੇ ਵਿੱਚ। ਵੀਰ ਰਸਤੇ ਬਵੇ ਬੁੱਧੀ ਬਵੇ। ਭਵੇ ਹੋਰ ਵੀ ਰਸ ਹੋ ਜਾਂਦਾ। ਤਾਂ ਉਪਦੇਸ਼ ਹੈ ਆਪ ਨਾ ਕਰੇ। ਅਵਰ ਉਪਦੇਸ਼ ਹੈ ਆਪ ਨਾ ਕਰੇ। ਆਪ ਜਨਮੇ ਬਰੇ। ਇੱਕ ਹਾਂ ਜੀ। ਕਿ ਹੈ ਉਹ ਆਦਿ ਰੂਪ ਦੇ ਜਿਹੜਾ ਧਰਮਕਾ ਹੈ ਧਰਮਕਾ ਉਹ ਤਾਂ ਆਮ ਆਦਮੀ ਦਾ ਬਰੇ ਜੀ ਨਹੀਂ ਗਿਆ ਅਵਰਤੋ ਦੂਜਨ ਬਰੇ ਜੀ ਨਹੀਂ ਗਿਆ ਉਹਨਾਂ ਆਗਿਆ ਭੰਤੀ ਅਵਰ ਉਪਦੇਸ਼ ਹੈ ਉਹ ਆਦਿ ਦੂਜੇ ਰੂਪ ਦੇ ਹੱਸਾ ਕੋਈ ਗੱਲ ਚੱਲਦੀ ਆਪ ਨਾ ধরে ਉਹ ਕਮ ਆਪ ਨਹੀਂ ਕਰਦਾ ਜਿਹੜਾ ਉਪਦੇਸ਼ ਕਰਦਾ ਅਸੀਂ ਕੁਰਬਾਨੀ ਪੜ ਕੇ ਲੋਕਾਂ ਨੂੰ ਕਹਿੰਦੇ ਆ ਆਪ ਨਹੀਂ ਕਰ ਫਿਰ ਉਹ ਆ ਕਿ ਜਨਮ ਬਰੇ ਆਪ ਨੂੰ ਜਨਮੇ ਬਰੇ ਉਹ ਜਾਨ ਜਬਰਦਸਤ तो ਟੁੱਟੇ ਕਿ के ਇਹ ਸਾਰੂ ਬੈਨ ਕਰ ਦੇ ਬੰਦੇ ਧਾਰਮਿਕ ਨੇ ਉਹ ਇਹ लगे ਲੱਗੇ ਹੋਏ ਨੇ ਲੱਗੇ ਹੋਏ ਸੀ ਉਦੋਂ ਹੁਣ ਵੀ ਦੇ ਫਿਰ ਜਦੋਂ ਧਾਰਮਿਕ ਕੋ ਧਾਰਮਿਕ ਆਪੂ ਹੀ ਇਹ ਕੰਬਲ ਕਰ ਰਿਹਾ ਕਿ ਜੋ ਲਿਖਿਆ ਹੋਇਆ ਦਰਸਾਤੇ خودوں کالڈی بن رہا خودوں سر احتولی قبول کر رہا وہ لوک تے سو پھر سو ہن ایتھے جب بھگت پیدا ہوندا ہے نا بندن والے پھر دوسرے لوگ بنتے ہیں نہیں ماندا کوئی کوئی تا لیڈر چاہیے آیا کوئی یار کوئی لیڈر اٹھے تے تو سانوں نجات کرا لے او بلک زو بھی تھی ہو تے لگی کوئی روناراں بھی ہو گئے कोई निजता चाहिदा ही है पूरे जनणा वाले कोई चेतना वाले डगले हुवे लीडर जब ज्यादा या पेशणा वाले पहला हुंदे ने, रे। ने, रे, ने, ने, ने लीडर ना लीडर कब जब होगा होता पेजे हुंदे ने ओदा जो लीडर हुदा ही नहीं पेशा ही हु हां जी जिसके अंतर बसे निरंकार देश की सिख तरह संसार जिसके अंतर बसे लोग का ਜਿਹਦੇ ਅੰਦਰ ਬਿਰੰਕਾਰ ਆਪ ਵਸਦਾ ਇੱਕੋ ਇੱਕੋ ਜਿਹਦੇ ਅੰਦਰ ਭਗਤ ਵਸਦਾ ਭਗਤ ਇਹ ਭਗਤ ਮੇਰੇ ਹਿਰਦੇ ਮਿਲਦਾ ਪਤਿਆ ਇਹ ਇੱਕੋ ਵਸਦਾ ਬਿਲਕੁਲ ਦਰਨਕਾਰ ਕੇ ਦੇਜਾਇ ਉਹ ਦੇਜਦੇ ਰਹਿਣ ਵਾਲੇ ਦਰਗਾਹ ਦੀ ਰਾਖੀ ਦੇ ਸਰਨ ਹੋਇਆ ਤਦ ਉਹ ਦੰਕਾਰ ਇਸ ਕੀ ਸਿੱਖ ਤਰੇ ਸੰਸਾਰ ਉਹਦੀ ਸਿੱਖਿਆ ਨੂੰ ਸੰਸਾਰ ਕਰ ਉਹ ਸਿੱਖਿਆ ਦਵੇ ਤਾਂ ਸੰਸਾਰ ਦਾ ਚਿੱਤ ਚਰੂ ਲੱਗਦਾ ਫਿਰ ਪਤਾ ਲੱਗਣਾ ਅਗਰ ਵੀ ਹਮਾਰੀ ਗੱਲ ਠੀਕ ਹੈ ਉਥੋਂ ਸੰਸਾਰ ਤਰਨ ਲੱਗਦਾ ਤਾਰਨ ਸਤਿਗੁਰ ਬਾਹਰ ਦੋ ਤੱਕ ਫਿਰੋ ਸੇ। ਜਾਕੇ ਅੰਤਰ ਵਸੇ ਨਿਰੰਕਾਰ ਜਿਹਦੇ ਅਤਨ ਅੰਕਾਰ ਵਸਦੇ ਵੇ ਉਹ ਸਿੱਖਿਆ ਦਵੇ ਜਿਸ ਦੀ ਉਹ ਕਦੇ ਨਾਨਕ ਦੇ ਰੂਪ ਚ ਪ੍ਰਗਟ ਹੋਇਆ ਗੁਰਬਾਣੀ ਕਦੇ ਭਗਤ ਕਬੀਰ ਹੋਇਆ ਕਦੇ ਕੋਈ ਹੋਇਆ ਕਦੇ ਕੋਈ ਹੋਇਆ ਉਹ ਗੁਰਬਾਣੀ ਸਾਡੇ ਕੋਲ ਹੈ ਜੀ ਖੋਜ ਹੈ ਜੜੀ ਹੈ ਇਹਦੀ ਖੋਜ ਹੈ ਤਾਰੂ ਦੀ ਇਸ ਤਰ੍ਹਾਂ ਦੀ ਵੀ ਨਹੀਂ ਸਾਡੇ ਕੋਲ ਕੋਈ ਨਾ ਵੀ ਨਹੀਂ ਦੇ ਸਕੀ ਜਦੋਂ ਵੀ ਨਹੀਂ ਕੋਈ ਵੀ ਨਹੀਂ ਦਾ ਜੇਤ ਲੱਭ ਸਕਦੇ ਰੱਬ ਹੋ ਸਕਦੇ ਜਿਹਨੂੰ ਲੋੜ ਹੈ ਸਾਡੀ ਥੱਲੇ ਪਾਣੀ ਆ ਬਿਜੜਾ ਡੁਗਾ ਵੀ ਹੈ ਲੋੜ ਬੰਦਾ ਨੇ ਕੱਢ ਵੀ ਲਿਆ ਫੇਖੋ ਲੈ ਬਾਗ ਵਿੱਚ ਦੋ ਦੋ ਦਰ ਡੁੱਕ ਕੇ ਫੁੱਲ ਤੇ ਲੋਕਾਂ ਨੇ ਲੋੜ ਜੋ ਉਹ ਬ੍ਰਿਜ ਬੰਦ ਨੇ ਜੀ ਦੇ ਜੋ ਰੇ ਰੋ ਲੇ ਕਾ ਤਾਂ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪ੍ਰਸਾਦ ਭਾਨੇ ਦਾ ਕੀ ਭਾਨਨੇ ਭਾਨੇ ਦਾ ਕੀ ਬੋਲਦਾ ਜੋ ਤੁਮ ਆਪਦੇ ਜਿਹੜੇ ਟਾਈਮ ਪਰ ਨੇ ਨਾ ਪੱਦੀ ਘੜੀ ਸੁਭਰਾ ਨੂੰ ਨੜ ਪੱਦੇ ਨੇ ਬਣਾ ਘੜੇ ਹੋਏ ਉਹ ਖਲੋਣੇ ਮੈਂ ਤੁਹਾਨੂੰ ਸਮਰੱਤ ਜਿਹੜੇ ਤਾਂ ਆਪਾਂ ਦੇ ਨੇ ਦੇ ਦੋ ਉਹਨਾਂ ਦੀ ਬਲੋਤ ਹੈ ਤੋੜੀ ਜਾਂਦੋ ਉਹ ਦਰੋਂ ਜਿਹੜੀਆਂ ਬਲੋਤਾਂ ਝੂਠੀਆਂ ਤਾਂ ਉਹ ਹੀ ਬਲੋਟੀਆਂ ਦੇ ਤੋੜਿਆ ਕੀ ਹੈ ਦੇ ਤਾਂ ਬੰਦ ਕੱਟੇ ਨੇ ਜਿਹੜੇ ਜਿੱਥੇ ਜੁੜੇ ਹੋਏ ਚ ਛੇ ਪ੍ਰਭ ਜੋ ਤੁਮ ਭਾਨੇ ਤਿਲ ਪ੍ਰਭ ਨਹੀਂ ਪ੍ਰਭ ਦਾ ਹੀ ਫਸਾ ਲੱਗਿਆ ਲੋਕਾਂ ਨੂੰ ਉਹ ਪ੍ਰਾਪਤ ਕੀ ਵਾਰ ਆ ਗੁਰਬਾਣੀ ਚ ਕਿੰਨੀ ਵਾਰ ਪ੍ਰਭ ਲਹਦਾ ਆ ਗੁਰਬਾਣੀ ਚ ਭਲਾ ਤੁਸੀਂ ਇਹ ਦੇਖੋ ਹਜ਼ਾਰਾਂ ਵਾਰ ਆਇਆ ਹੋ ਹੁਣ ਇੱਥੇ ਇਹ ਆ ਗਿਆ ਟੀਕਾ ਕਹਿੰਦੇ ਟੀਕੇ ਲੱਗਦੇ ਉਹ ਕਹਿੰਦੇ ਜੋ ਤੁਮ ਪਾਉਂਦੇ ਸਿਰਭ੍ਰਮ ਜਾਂਦਾ ਤੇ ਉਹਨਾਂ ਨੇ ਸਮਝਾਉਣਾ ਟੀਕਾ ਕਹਿੰਦੇ ਲੋਕ ਜੀ ਨਾਲ ਦੀ ਬਤੋ ਨੇ ਤੋੜੀ ਐ ਨਾ ਆਪ ਪਰਮੇਸ਼ਰ ਨੇ ਉਹਨਾਂ ਨੇ ਜਾਣਿਆ ਪ੍ਰਭ ਕੌਮ ਹੁੰਦਾ ਹੈ ਕੌਣ ਹੁੰਦਾ ਹੀ ਜਾਣਿਆ ਜੇ ਰੱਬ ਦੇ ਬਿਰਦ ਦੀ ਗੱਲ ਛੱਡੋ ਤੁਸੀਂ ਮੈਂ ਤਾਂ ਉਹਨਾਂ ਪ੍ਰਭ ਦਾ ਇਤਾਲਾ ਲਿਆ ਜੀ ਨੂੰ ਪ੍ਰਭ ਦਾ ਬਗਤ ਨੂੰ ਨੀਕਾ ਸਮਝਦਾ ਤੋ ਪ੍ਰਭ ਦਾ ਨਹੀਂ ਕਿ ਸਾਨੂੰ ਪਤਾ ਹੈ ਗੁਰਬਾਣੀ ਕਿੱਦੀ ਹੈ ਜੋ ਤੁਮ ਪਾਸ ਦੇ ਪ੍ਰਭ ਦੱਸਦਾ ਇਹ ਆਉਂ ਤਾ ਤੋੜਿਆ ਤੇ ਤਾ ਚ ਤੋੜਿਆ ਬਾਤਿਆਂ ਨਾਲ ਜੋੜਿਆ ਆਪਣੇ ਨਾਲ ਜੋੜਿਆ ਚੂੜ ਨਾਲ ਤੋੜਿਆ ਸੱਚ ਨਾਲ ਜੋੜਿਆ ਤਾਂ ਉਹਨਾਂ ਨੇ ਪ੍ਰਭ ਜਾਣ ਲਿਆ ਪ੍ਰਭ ਦਾ ਹੀ ਪਤਾ ਲੋਕਾਂ ਉਹ ਆਪਣਾ ਪ੍ਰਭ ਬਣ ਗਏ ਪ੍ਰਭਿਆਂ ਦੇ ਵੂਟੀਆਂ ਮਾਰ ਗਏ ਜਾਣਿਆਂ ਦਾ ਸਮਾਵਰਨ ਆ ਗਿਆ ਪ੍ਰਭ ਦਾ ਕਦੇ ਛੱਪਿਆ ਹੀ ਨਹੀਂ ਨਾਲੇ ਕਰਨੇ ਪ੍ਰਭਾ ਖਾਡੂੜੀ ਦੀ ਨਾਲੇ ਪ੍ਰਭ ਦੀ ਗੁਰ ਤੇ ਬਣੇ ਹਾਂ ਜੀ ਬਰਾਵੰਤਰਾ ਸਭ ਦੇ ਨੂੰ ਜਾਣੇ ਤੇ ਸਜੇ ਜੋ ਤੁਨੂੰ ਭਾਨੇ ਤਿਲ ਬਰੋ ਜਾਣੇ ਤੇ ਦੱਸਿਆ ਜਿਹਨੇ ਦੱਸਿਆ ਜੂਣੇ ਜਾਣੇ ਜਿਹਨੇ ਦੱਸਿਆ ਜੂਣੇ ਜਾਣਿਆ ਨਹੀਂ ਉਹ ਹਾਂ ਠੱਗੀ ਮਾਰੀ ਹੋਵੇ ਲੋਕਾਂ ਨੂੰ ਰਿਆ ਹੋਵੇ ਮੈਂ ਜਾਣੇ ਹੈ ਜਾਣੇ ਉਹ ਦੱਸਣ ਵਾਲੇ ਪੁੱਤ ਦੱਸਿਆ ਸਾਰਿਆਂ ਨੇ ਸਾਥੇ ਦੱਸਿਆ ਹਲ ਜਲਦਾ ਪਈ ਜਿਨ੍ਹਾਂ ਨੂੰ ਪਹਿਲਾਂ ਦੱਸਿਆ ਉਹ ਤਾਂ ਖਿਆਲ ਦਾ ਸੱਤ ਦਾ ਸੱਤ ਜਲੀ ਬਗਾ ਲੱਗਦਾ ਪਰ ਅਸਲੀ ਰੋਣਾ ਬਹੁਤ ਪਿਆਰੀ ਬਾਤ ਅਸੀਮੀ ਦਾ ਜਿਹੜਾ ਪਰ ਦੱਸਿਆ ਉਹ ਹੀ ਸੁਣਿਆ ਆਏ ਬਾਤ ਕੁਰਬਾਨੀ ਜਿਹੜਾ ਪਰ ਦੱਸਿਆ ਹੋਰ ਹੈ ਅਸੀਂ ਜੋ ਹੋਰ ਬੋਲਦੇ ਆਂ ਕੁਰਬਾਨੀ ਹੋਰ ਦੱਸਦੀ ਹੈ ਅਸੀਂ ਨਾਮ ਹੋਰ ਬੋਲਦੇ ਆਂ ਕੁਰਬਾਨੀ ਹੋਰ ਦੱਸਦੀ ਹੈ ਸਾਰੀਓ ਪੜਾਈ ਹੁੰਦਾ ਐਵੇਂ ਬਰਾਬਰ ਹੈ ਜਿਹਨੇ ਕਹਿੰਦੇ ਜੋ ਤੁੰਬ ਭਾਦੇ ਤੈਨੂੰ ਪ੍ਰਭ ਜਤਾਰ ਆ ਛੋਟਾ ਜਿਹਾ ਲੱਗਦਾ ਜੋ ਤੁੰਬ ਆਨੇ ਜੋ ਤੁੰਬ ਆਨੇ ਥੋੜੇ ਲੱਗਦਾ ਪਰ ਪ੍ਰਭ ਜਤਾਰ ਇਹ ਨਾਲਾ ਭਰਮ ਦਾ ਅੰਡਾ ਤੋੜਦਾ ਤਾਂ ਉਹਨਾਂ ਨੇ ਜਾਣੇ ਫਰੋਕ ਕੀਆ ਜਨਰੇ ਭਰਮ ਦੇ ਅੰਡੇ ਤੋਂ ਫਰੋਕ ਦਾ ਪੋਤਾ ਵੀ ਜੀ। ਉਹਨੂੰ ਨੋ ਪਿਆ। ਤਾਂ ਬੇੜੀ ਪਗਾ ਤੇ। ਤਹਾਰ ਬੇੜੀ ਪਗਾ ਤੇ ਛੋਟੀ ਜੀ ਗੱਲ ਨਾ ਬਿਲਕੁਲ ਸੋਖੀ ਜੋ ਤੁਮ ਬਾਣੇ ਤੈਨੂੰ ਪਰਮ ਜਾਤਾ ਲੈ ਤੇ ਪੰਤੀ ਸੋਖੀ ਹੋਊ ਕਹੀ ਉਹਦੀਓ ਫਤਨਾ ਕਰ ਰੋਕੀ ਆ ਜਿੱਤੇ ਤੁਹਾਨੂੰ ਲੱਗਦੀ ਹੈ ਨਾ ਗੱਲ ਸੋਖੀ ਹੈ ਉਹਦੀਓ ਗੱਲ ਰੁਕੀ ਹੋਏ ਸੋਖੀ ਹੋਇਆ ਬਾਣੇ ਇਹ ਬਾਣੇ ਦਸ ਦੇ ਆਲਾ ਪਾਡੇ ਰੋਣੇ ਨਾਲ ਨਹੀਂ ਹੈ ਹਾਂ ਜੋ ਤੋਂ ਪਾੜੇ ਜੇ ਜੋ ਤਿੰਨ ਪ੍ਰੋਗ ਜਾਂਦਾ ਤਿੰਨ ਪ੍ਰੋਗ ਜਾਂਦਾ ਉਹਨਾਂ ਦੇ ਪ੍ਰੋਗ ਜਾਂਦੇ ਜਾਂ ਤਾਂ ਭਰਮ ਦੇ ਅੰਡੇ ਜੋ ਬਾਹਰ ਕੱਢੇ ਦੇਣਾ ਤਾਂ ਉਹਨਾਂ ਪ੍ਰੋਗ ਜਾਂਦੇ ਹਾਂ ਹਾਂਜੀ ਨਾਨਕ ਉਨਜਨ ਚਰਨ ਆਪਣੇ ਗੁਰੂ ਚਾਰ ਉਹ ਸਾਰਿਆਂ ਦੀ ਗੱਲ ਕਰ ਰਹੇ ਸੀ ਮੈਂ ਉਹਨਾਂ ਜਿਹੜੇ ਉਹ ਆਦਮੀ ਦੇ ਉਹਨਾਂ ਦੇ ਜਿਹੜੇ ਚੱਲ ਉਹਨਾਂ ਦੇ ਪਿੱਛੇ ਲੱਗੇ ਚੱਲੂ ਕਰਤਾ ਉਹਨਾਂ ਦੀ ਪੈਰ ਚੱਲ ਚੱਲ ਰਹੇ ਉਹਾਂ ਦੇ ਪੱਜਨਾ ਦੇ ਚਾਹਦੇ ਫੁਟਪ੍ਰਿੰਟ ਦੇ ਚਾਹਦੇ ਉਹ ਨਹੀਂ ਕੁੜਾ ਇੱਥੇ ਜਿਆਫਾ ਇਹ ਪੱਤੀ ਨੂੰ ਲਈਏ ਜਿਨ੍ਹਾਂ ਨੇ ਪ੍ਰਭੂ ਜਾਣ ਲਿਆ ਉਹਨਾਂ ਦੀ ਬਗਦਰ ਤਾਂ ਸੱਤਣਾ ਹੋਇਆ ਤੇ ਤੁਸੀਂ ਕਿਹਦੇ ਮੁਕਰ ਕਿਉਂ ਦੇਖੋ ਨਾਲ ਪੱਜਨਾ ਬਸੰਪੂਰਨ ਬਾਣੀ ਲਾ ਲਈ ਜਦੋਂ ਵਰਜੀ ਝੂੜ ਹੋਲੀ ਜਾਇਓ ਗੁਰਬਾਣੀ ਸੱਚ ਇਹਦੇ ਵਿੱਚ ਬਹੁਤ ਜੁਦਦਿਆ ਉਹ ਲੋਕਾਂ ਦੇ ਜਿਨ੍ਹਾਂ ਨੇ ਪ੍ਰਚਾਰ ਹੁਣ ਤੇ ਕੀਤਾ ਉਹਨਾਂ ਦਾ ਸਾਥ ਕਿਸੇ ਨੇ ਵਿਸ਼ਵਾਸੇ ਨਹੀਂ ਕਰਦਾ ਕਿ ਬਸ ਕਿ ਿਰਮਲ ਬਦਨਾਮ ਉਹ ਲੋਕ ਬਦਨਾਮ ਸੀ ਉਹ ਤੋਂ ਜ਼ਿਆਦਾ ਬਦਨਾਮ ਨੇ ਉਹਨਾਂ ਨੇ ਇਹ ਜਾਣੇ ਕਬ ਕੀਤਾ ਜਾਈ ਇਹ ਉਹ ਪ੍ਰਚਾਰ ਕਰੀ ਜਾਂਦੇ ਸੀ